ਸਾਜਿ ਮਨ ਦੇ ਮੀਤ ਜੀਆਂ ਸਾਈ ਗੁਰ ਜਗ ਮਨ ਦੇ ਮੀਤ ਜੀਆਂ ਸਾਈ ਗੁਰ ਜਗ ਕੀ ਮਨ ਦੇ ਮੀਤ ਲੱਗਦਾ ਬਾਪਾ ਬਨਾਨ ਕਾ ਤੇਰੇ ਕੀਆ ਤੇਰੇ ਕੀਆ ਨਹੀਂ ਕੋਈ ਪੀਰ ਪਕਮੜ ਕੋਈ ਸਮਝ ਨਹੀਂ ਰੱਬ ਸਮਝ ਨਹੀਂ ਕੋਈ ਪੀਰ ਪਕਮੜ ਕੋਈ ਸਮਝ ਨਹੀਂ ਦੇ ਕਲਾ ਤੇਰੀ ਸਾਡੀ ਕਲਾ ਉਹ ਦਰ ਤੇਰੇ ਤੇ ਸਦਗੁਰ ਨਾਨਵ ਸ਼ਾਵਾ ਮਹਾਂਸਤ ਗਾਜ ਸਤ ਸੰਗਤ ਜੀ ਸਤਗੁਰੂ ਦੀ ਉਪਮਾ ਤੇ ਕਰਨ ਨੂੰ ਸਤਗੁਰੂ ਕਰਨ ਉਹ ਜੀ ਬੁੱਧੀ ਬਖਸ਼ਣ ਫੇਰੀ ਹੋ ਸਕਦੀ ਹੈ ਸਾਡੇ ਵਰਗੇ ਕੋਲ ਤੇ ਬਹੁਤ ਜਿੱਦਾ ਕੀ ਕਹਿ ਸਕਦੇ ਹਾਂ ਹਾਜ਼ਰੀ ਲਾਉਣ ਲਈ ਬੈਠੇ ਹਾਂ ਅਸੀਂ ਤਾਂ ਇੱਕ ਯਾਦ ਹੈ ਜਿਸ ਤਰ੍ਹਾਂ ਹੁਣ ਦੀਵਾਲੀ ਨਿਕਲੀ ਆ ਦੀਵਾਲੀ ਦੇ ਤਰ੍ਹਾਂ ਤੇ ਇੱਕ ਯਾਦ ਆ ਗਈ ਛੋਟੀ ਜੀ ਸਾਖੀ ਸਮਝ ਲਓ ਸਾਨੂੰ ਛੋਟੇ ਹੁੰਦੇ ਸੁਣਾਉਂਦੇ ਹੁੰਦੇ ਸੀ ਉਹ ਐਸਾ ਦੀਵਾਲੀ ਦੇ ਦਿਨ ਪਹਿਲੇ ਜਵਾਨੇ ਜੀ ਹੁਣ ਵੀ ਆਂਦੇ ਨੇ ਸੰਤ ਹੁੰਦੇ ਨੇ ਉਹ ਫੇਰੀ ਲਾਇਆ ਕਰਦੇ ਆ ਫੇਰੀ ਦਾ ਮਤਲਬ ਉਹਨਾਂ ਨੇ ਸ਼ਬਦ ਪੜ੍ਹਦੇ ਨੇ ਗਲੋ ਗਲੀ ਹਰ ਇੱਕ ਗਲੀ ਦੇ ਵਿੱਚ ਫਿਰਦੇ ਹੁੰਦੇ ਆ ਤੜਕੇ ਸਵੇਰੇ ਕਬੀਰ ਦੇ ਜਾਂ ਫਰੀਦ ਦੇ ਸ਼ਬਦ ਪੜ੍ਹਦੇ ਹੁੰਦੇ ਆ ਉਹਨਾਂ ਨੇ ਕਰਨਾ ਚਾਰ ਵਜੇ ਪਹਿਲਾਂ ਸਾਰੇ ਪਾਸੇ ਫੇਰੀ ਲਾਣੀ ਆ ਫਿਰ ਜਦੋਂ ਦਿਨ ਚੜ ਜਾਣਾ ਫਿਰ ਉਹਨਾਂ ਨੇ ਉਸੇ ਲਾਈਨ 'ਚ ਫੇਰ ਆਣਾ ਫਿਰ ਕੀ ਆ ਕਿ ਕਿਸੇ ਨੇ ਜੋ ਵੀ ਦੇਣਾ ਉਹਨਾਂ ਨੇ ਉਹ ਆਟਾ ਦਾਲ ਪੈਸੇ ਜੋ ਵੀ ਮਿਲ ਨੇ ਉਲ ਕੇ ਹਰਮੰਦਰ ਸਾਹਿਬ ਲੰਗਰ 'ਚ ਪਾਣੀ ਤੇ ਉਹ ਜਿੱਦੋਂ ਦੀ ਲੰਗਦੇ ਸੀ ਹਰ ਰੋਜ਼ ਉੱਥੇ ਇੱਕ ਬੀਬੀ ਹੁੰਦੀ ਸੀ ਉਹ ਵਿਚਾਰੀ ਘਰ ਦੇ ਕਮਾਂਕਾਰਾਂ ਚ ਬੜਾ ਦੁਖੀ ਸੀ ਦੁਖੀ ਤੇ ਨਹੀਂ ਉਹਦਾ ਬੇਲ ਨਹੀਂ ਲੱਗਦਾ ਹੋਏਗਾ ਉਹ ਰੋਜ਼ ਜਦੋਂ ਆਉਂਦੇ ਸੀ ਤੇ ਉਹ ਆਪਣੀਆਂ ਫਰਸ਼ਾਂ ਸਾਫ਼ ਕਰਿਆ ਕਰਦੀ ਸੀ ਜਿਸ ਵੇਲੇ ਸੰਤ ਆਉਂਦੇ ਸੀ ਤੇ ਉਹਨੂੰ ਇੱਕ ਦਿਨ ਗੁੱਸਾ ਆਇਆ ਕਹਿੰਦੀ ਸਾਰੇ ਲੋਕੀ ਦਾਨ ਦਿੰਦੇ ਤੇ ਮੇਰੇ ਕੋਲ ਤਾਂ ਕੁਛ ਹੈ ਨਹੀਂ ਕਿ ਮੈਨੂੰ ਕੋਈ ਫਾਇਦਾ ਵੀ ਨਹੀਂ ਹੁੰਦਾ ਇਹਨਾਂ ਦੀ ਰੋਜ਼ ਇਹਨਾਂ ਦੇ ਭਜਨ ਜੋ ਸ਼ਬਦ ਸੁਣਦੀਆਂ ਉਹ ਸੰਤ ਕੋਲ ਦੀ ਲੰਗਣ ਲੱਗੇ ਤਾਂ ਬੀਬੀ ਨੇ ਨਾ ਮਿੱਟੀ ਦਾ ਭਰਿਆ ਕੱਪੜਾ ਜਿਹੜਾ ਆਪਾਂ ਨਰੋਬੀ ਤਾਂ ਨੂੰ ਫੰਗੂਸਾ ਕਹਿ ਦਿੰਦਾ ਆ ਕੋਈ ਪੋਚਾ ਕਹਿ ਦਿੰਦਾ ਉਹ ਮਿੱਟੀ ਦਾ ਭਰਿਆ ਸਾਰੇ ਘਰ ਦਾ ਉਹ ਕੱਪੜਾ ਉਹ ਸੰਤਾਂ ਦੇ ਹੱਥ ਉੱਤੇ ਸੁੱਟ ਦਿੱਤਾ ਕਹਿੰਦੀ ਆ ਲੈ ਮੇਰੇ ਪੱਲੇ ਤਾਂ ਹੀ ਪਿਆ ਇਸ ਦੁਨੀਆ ਤੇ ਗੁੱਸੇ ਚ ਆ ਕੇ ਮੈਂ ਦਸਣ ਲੱਗੀ ਆ ਜਿਹੜੇ ਭਜਨ ਬੰਦਗੀ ਕਰਨ ਵਾਲੇ ਆ ਉਹ ਭਲਾ ਹਰ ਇੱਕ ਤਰ੍ਹਾਂ ਕਰਦੇ ਇਨਸਾਨ ਦਾ ਉਹਨਾਂ ਨੇ ਸੰਤਾ ਨੇ ਉਹ ਕੱਪੜਾ ਨੂੰ ਲੈ ਲਿਆ ਗੁੱਸਾ ਨਹੀਂ ਕੀਤਾ ਕਿ ਬੀਬੀ ਤੂੰ ਮੇਰੇ ਤੇ ਤਾਂ ਗੰਦ ਦਾ ਛਿੱਟੇ ਪਾ ਦਿੱਤੇ ਆ ਜਾਂ ਮੈਨੂੰ ਗੰਦਾ ਕੱਪੜਾ ਦਿੱਤਾ ਘਰ ਲੈ ਕੇ ਗਏ ਘਰ ਲੈ ਕੇ ਉਹਨੂੰ ਸਾਫ਼ ਕੀਤਾ ਧੋਤਾ ਧੋ ਕੇ ਦਿਵਾਲੀ ਸੀ ਉਹਨਾਂ ਨੇ ਉਹਦਾ ਇੱਕ ਇੱਕ ਧਾਗਾ ਕੱਢਿਆ ਇੱਕ ਇੱਕ ਧਾਗਾ ਕੱਢ ਕੇ ਉਹਦੀਆਂ ਬੱਤੀਆਂ ਵਟੀਆਂ ਬੱਤੀਆਂ ਵਟਕੇ ਦੀਵੇ ਦੇ ਵਿੱਚ ਤੇਲ ਦੀਵਿਆਂ ਚ ਪਾ ਕੇ ਉਹ ਬੱਤੀਆਂ ਰੱਖ ਕੇ ਤੇ ਦੀਪਮਾਲਾ ਹਰਿਮੰਦਰ ਸਾਹਿਬ ਕੀਤੀ। ਉਹ ਹਰਿਮੰਦਰ ਸਾਹਿਬ ਦੇ ਵਿੱਚ ਦੀਵੇ ਕਰਮ ਬਦਲ ਗਏ। ਸੋ ਸਤਿਗੁਰ ਜੀ ਦਾ ਭਜਨ ਬੰਦਗੀ ਜਿਹੜੀ ਆ ਸਤਿਗੁਰ ਕਿਰਪਾ ਕਰਨ ਉਹਦੇ ਚ ਸਾਨੂੰ ਐਡੀਆਂ ਵੱਡੀਆਂ ਅੱਖਾਂ ਮਿਲ ਜਾਣ ਜਿਹਦੇ ਨਾਲ ਅਸੀਂ ਦੂਸਰਿਆਂ ਦਾ ਭਲਾ ਕਰ ਸਕੀਏ।